अर्ज ਕੀਤਾ है जी, ਸੁਰਤੀ ਜੋਣਨੀ ਉਹਦੇ ਪ੍ਰੇਮ ਦੇ ਭਰੇ ਭੰਡਾਰੇ ਵਿੱਚੋਂ ਉਹਦੇ ਪ੍ਰੇਮ ਦੇ ਭਰੇ ਭੰਡਾਰੇ ਵਿੱਚੋਂ ਕੋਈ ਘੁੱਟ ਪੀਂਦਾ ਤੇ ਕੋਈ ਜਾਮ ਪੀਂਦਾ ਉਹਦੇ ਪ੍ਰੇਮ ਦੇ ਭਰੇ ਭੰਡਾਰੇ ਵਿੱਚੋਂ ਕੋਈ ਘੁੱਟ ਪੀਂਦਾ ਤੇ ਕੋਈ ਜਾਮ ਪੀਂਦਾ ਕੋਈ ਪੀਂਦਾ ਹੈ ਇਸ਼ਕ ਦੀ ਧਾਰ ਵਿੱਚੋਂ ਕੋਈ ਪੀਂਦਾ ਹੈ ਇਸ਼ਕ ਦੀ ਧਾਰ ਵਿੱਚੋਂ ਕੋਈ ਚੁੱਪ ਤੇ ਕੋਈ ਆਮ ਪੀਂਦਾ ਕੋਈ ਚੁੱਪ ਪੀਂਦਾ ਤੇ ਕੋਈ ਆਮ ਪੀਂਦਾ ਕੋਈ ਪੀਂਨ ਤੇ ਕਿਸੇ ਨੂੰ ਰੋਕ ਨਾਹੀ ਕੋਈ ਪੀਂਨ ਤੇ ਕਿਸੇ ਨੂੰ ਰੋਕ ਨਾਹੀ ਕੋਈ ਸੁਭਾ ਪੀਂਦਾ ਤੇ ਕੋਈ ਸ਼ਾਮ ਪੀਂਦਾ ਕੋਈ ਹਿਸਾਬ ਨਹੀਂ ਉਹਦੀਆਂ ਰਹਿਮਤਾਂ ਦਾ ਕੋਈ ਹਿਸਾਬ ਨਹੀਂ ਉਹਦੀਆਂ ਰਹਿਮਤਾਂ ਦਾ ਕੋਈ ਰਹੀਮ ਪੀਂਦਾ ਤੇ ਕੋਈ ਰਾਮ ਪੀਂਦਾ ਕੋਈ ਬ੍ਰਹਮ ਦੇ ਨਾਲ ਹੈ ਬ੍ਰਹਮ ਹੁੰਦਾ ਕੋਈ ਬ੍ਰਹਮ ਦੇ ਨਾਲ ਹੈ ਬ੍ਰਹਮ ਹੁੰਦਾ ਬੇਕੁੰਠ ਤਾਮ ਦਾ ਕੋਈ ਇਲਹਾਮ ਪਿੰਦਾ ਕੋਈ ਆਵੇ ਹਯਾਤ ਦੀ ਖੋਜ ਕਰਦਾ ਕੋਈ ਆਵੇ ਹਯਾਤ ਦੀ ਖੋਜ ਕਰਦਾ ਕੋਈ ਸ਼ਬਦਾਂ ਮਿਲਿਆ ਪੈਗਾਮ ਪਿੰਦਾ ਕੋਈ ਸ਼ਬਦਾਂ ਮਿਲਿਆ ਪੈਗਾਮ ਪਿੰਦਾ ਉਹ ਪਿਓ ਰੱਜ ਕੇ ਬੁੱਧ ਬਵੇਕ ਹੋ ਜਾਏ ਪਿਓ ਰੱਜ ਕੇ ਬੁੱਧ ਬਵੇਕ ਹੋ ਜਾਏ ਇਹ ਕਿਉਂਕਾਰ ਦਾ ਜੋ ਵੀ ਨਾਮ ਪਿੰਦਾ ਉਹ ਤਾਰੇ ਅੰਬਰ ਤੇ ਸਲਾਮ ਕਰਦੇ ਜਿਹੜਾ ਅੰਬਰ ਤੋਂ ਆਉਂਦਾ ਕਲਾਮ ਪਿੰਦਾ ਪਿਆਰੇ ਸਾਧ ਸਿੰਘ ਜੀਓ ਨਾਮਧਾਰੀ ਪੰਥਰੇ ਵਿੱਚ ਤੁਹਾਨੂੰ ਬੜੇ ਬੜੇ ਵਿਦਵਾਨ ਮਿਲਣਗੇ ਬੜੇ ਬੜੇ ਕਵੀ ਪੈਦਾ ਕੀਤੇ ਨੇ ਨਾਮਧਾਰੀ ਪੰਥ ਨੇ ਬੜੇ ਬੜੇ ਸੰਗੀਤਕਾਰ ਪੈਦਾ ਕੀਤੇ ਨੇ ਤੋਂ ਮੈਂ ਅਰਜ਼ ਕਰਾਂ ਕਿ ਜਿਹੜੀ ਸਪਿਰਿਟ ਅੱਜ ਤੋਂ 100 ਸਾਲ ਪਹਿਲਾਂ ਸੀ ਮਾਫ ਕਰਨਾ ਕਈ ਦਫਾ ਸੱਚੀ ਗੱਲ ਕਹੀ ਜਾਂਦੀ ਆ ਉਹ ਸਪਿਰਿਟ ਘਟ ਗਈ ਆ। ਔਰ ਇਸ ਨੂੰ ਬਰਕਰਾਰ ਰੱਖਣ ਵਾਸਤੇ ਕੁਝ ਮਿਹਨਤ ਦੀ ਲੋੜ ਆ। ਸੋ ਆਪ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਤੁਹਾਡੇ ਵਿੱਚ ਬੜਬੜੇ ਐਂਟੀ ਇਲੈਕਚੁਅਲ ਬੰਦੇ, ਸੂਝਵਾਨ ਬੰਦੇ ਹੈਗੇ ਨੇ ਉਹ ਇਸ ਨੂੰ ਸਿਰਜੀਤ ਰੱਖ ਸਕਦੇ ਨੇ। ਮੈਂ ਗੱਲ ਇੰਟਰਨੈਸ਼ਨਲੀ ਕਰ ਰਿਹਾ ਮੈਂ ਸਿਰਫ ਇੰਡੀਆ ਦੀ ਗੱਲ ਨਹੀਂ ਕਰ ਰਿਹਾ। ਸਾਰੇ ਧਰਮਾਂ ਦਾ ਵੈਸੇ ਹਾਲਤਾ ਇਹੋ ਹੀ ਆ। ਪਰ ਮੈਂ ਨਾਮਧਾਰੀ ਪੰਥ ਦੀ ਦਿਲੋਂ ਰਿਸਪੈਕਟ ਕਰਦਾ ਨਾਮਧਾਰੀ ਪੰਥ ਦੇ ਵਿੱਚ ਆਮ ਅਸੀਂ ਕਹਿੰਨੇ ਆ ਜੀ ਦਾਨੀ ਪਾਕਤਾ ਸੂਰਮਾ ਦਾਨੀ ਪਾਕਤਾ ਸੂਰਮਾ ਪਰ ਇਹ ਗੱਲ ਨਾਮਧਾਰੀਆਂ ਤੋਂ ਸਵਾਹ ਹੋਰ ਕਿਸੇ ਪਾਸੇ ਨਹੀਂ ਦੇਖੀ ਜਾ ਸਕਦੀ ਪੈਰੀ ਸਾਧ ਸੰਗ ਜੀ ਹੁਣ ਇਨਾ ਸਮਾਂ ਨਹੀਂ ਮੈਂ ਸਿੱਖ ਪੰਥ ਬਾਰੇ ਵੀ ਦੂਜੇ ਪੰਥਾਂ ਬਾਰੇ ਵੀ ਗੱਲ ਸ਼ੁਰੂ ਕਰਨੀ ਚਾਹੁੰਦਾ ਸੀ ਪਰ ਮੈਂ ਇਸ ਪਾਸੇ ਨਹੀਂ ਜਾਵਾਂਗਾ ਸਮਾਂ ਚਾਹੀਦਾ ਸੱਚ ਦਾ ਪਰ ਜਾਣੀਏ ਜੇ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਇਹ ਹੈ ਦਾਨੀ ਦੀ ਕੁਰਬਾਨੀ ਜਿਹੜੀ ਕਿ ਨਾਮ ਨੇ ਕਰਕੇ ਦਿਖਾਤੀ ਆ ਅੱਗੇ ਹੈ ਭਗਤੀ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੇ ਸੋਕੀਅਤ ਹੈ ਸੂਰਾ ਆਤਮ ਜਣੇ ਸਗਲ ਬਸਤਾ ਕੇ ਜਾ ਕਾ ਪੂਰਾ ਇਹ ਵੀ ਨਾਮ ਨੇ ਕਰਕੇ ਦਿਖਾਤਾ ਅੱਗੇ ਹੈ ਸੂਰਮਾ ਸੂਰਾ ਸੋਪੇ ਚਾਨੀਏ ਜੋ ਲੜੇ ਦੀਨ ਕੇ 헤ਤ ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾਡੇ ਖੇਤ ਇਹ ਵੀ ਗੱਲ ਵੀ ਨਾਮਧਾਰੀਆਂ ਨੇ ਕਰਕੇ ਦਿਖਾਤੀ ਆ ਪੰਥ ਦਾ ਕੋਈ ਵੀ ਬੰਦਾ ਵਿਦਵਾਨ ਦਾਸ ਨਾਮ ਆ ਕੇ ਗੱਲਬਾਤ ਕਰ ਸਕਦਾ ਮੈਂ ਸਾਬਤ ਕਰਾਂਗਾ ਕਿ ਤੁਸੀਂ ਸੱਚੇ ਹੋ ਜਾਂ ਨਾਮਧਾਰੀਏ ਸੱਚੇ ਨੇ ਆਓ ਮੈਂ ਹੁਣ ਕਵਤਾ ਲੱਗਾ ਸ਼ੁਰੂ ਕਰਨ ਜਿਹੜੀ ਕਿ ਭਗਤੀ ਸ਼ਕਤੀ ਦੀ ਕਵਤਾ ਹੈ ਕਪਤਾ ਤੇ ਇੱਕ ਹੋਰ ਵੀ ਪੜਨੀ ਸੀ ਪਰ ਮੈਂ ਸਮਝਿਆ ਕਿ ਅੱਜ ਮੈਂ ਇਹ ਇਹ ਸਬਜੈਕਟ ਸ਼ੁਰੂ ਕਰ ਬੈਠਾ ਆ ਤੇ ਇਹੀ ਤੁਸੀਂ ਸੁਣੋ ਭਗਤੀ ਦਾ ਸ਼ਕਤੀ ਕੋਕਿਆਂ ਦੇ ਵਿੱਚ ਕਿਵੇਂ ਸ਼ਕਤੀ ਆਈ ਨਾਮ ਦੇ ਥਰੂ ਨੇਰੀ ਜ਼ੁਲਮ ਦੀ ਚੱਲੀ ਸੀ ਪਿ੍ਰਥਵੀ ਤੇ ਨੇਰੀ ਜ਼ੁਲਮ ਦੀ ਚੱਲੀ ਸੀ ਪਿ੍ਰਥਵੀ ਤੇ ਉਸੇ ਨਾਲ ਤੜਫਿਆ ਅਰਸ਼ਾਂ ਦੇ ਤਾਰਿਆਂ ਦਾ ਸੀਨਾ ਤੜਫਿਆ ਅਰਸ਼ਾਂ ਦੇ ਤਾਰਿਆਂ ਦਾ ਚਾਰ ਚੁਫੇਰੇ ਸੀ ਖੂਨ ਦੀ ਘਟਾ ਤੇ ਕਤਲੇ ਆਮ ਹੁੰਦਾ ਰੱਬ ਦੇ ਪਿਆਰਿਆਂ ਦਾ ਕਤਲੇ ਆਮ ਹੁੰਦਾ ਰੱਬ ਦੇ ਪਿਆਰਿਆਂ ਦਾ ਹਾਕਮ ਬਣੇ ਕਸਾਈ ਨੇ ਕਹਿਰ ਕਰ ਦੇ ਹਾਕਮ ਬਣੇ ਕਸਾਈ ਸੀ ਕਹਿਰ ਕਰ ਦੇ ਓਏ ਹੱਕ ਮਾਰ ਦੇ ਧਰਮੀ ਵਿਚਾਰਿਆਂ ਦਾ ਕਿਰਤੀ ਕਾਮੇ ਦੀ ਕਿਰਤ ਅਲੋਪ ਹੋਈ ਆਵਾ ਉਤਿਆ ਜ਼ਾਲਮ ਹਤਿਆਰਿਆਂ ਦਾ ਆਵਾ ਉਤਿਆ ਜ਼ਾਲਮ ਹਤਿਆਰਿਆਂ ਦਾ ਏਕ ਓਂਕਾਰ ਦਾ ਹੱਥ ਵਿੱਚ ਪਕੜ ਝੰਡਾ ਏਕ ਓਂਕਾਰ ਦਾ ਹੱਥ ਵਿੱਚ ਪਕੜ ਝੰਡਾ ਸਤਨਾਮ ਦਾ ਬਿਗਲ বাজਾਈ ਜਾਵੋ ਓ ਧਰਤੀ ਮਾਤਾ ਦੇ ਧਰਮੀ ਸਕੂਤ ਬਣ ਕੇ ਧਰਮ ਯੁੱਧ ਲਈ ਜੀਵਨ ਲਗਾਈ ਜਾਵੋ ਜੇ ਦੀ ਸੱਚ ਤੋਂ ਬੁੱਧ ਬਵੇਕ ਹੋ ਜਾਏ ਜੇ ਦੀ ਸੱਚ ਤੋਂ ਬੁੱਧ ਬਵੇਕ ਹੋ ਜਾਏ ਉਹਦਾ ਮਨ ਸੱਚਾ ਤੇ ਉਚਾਰ ਸੱਚਾ ਜੇ ਦੀ ਸੱਚ ਤੋਂ ਬੁੱਧ ਬਵੇਕ ਹੋ ਜਾਏ ਉਹਦਾ ਮਨ ਸੱਚਾ ਤੇ ਉਚਾਰ ਸੱਚਾ ਸੱਚ ਧਰਮ ਦੀ ਕਿਰਤ ਨੂੰ ਤੋਲਦਾ ਜੋ ਉਹਦਾ ਬੋਲ ਸੱਚਾ ਤੇ ਵਿਹਾਰ ਸੱਚਾ ਜਦੋਂ ਰੂਹਾਂ ਨੂੰ ਸੱਚ ਨਾਲ ਤੋਲਦਾ ਹੈ ਜਦੋਂ ਰੂਹਾਂ ਨੂੰ ਸੱਚ ਨਾਲ ਤੋਲਦਾ ਹੈ ਉਹਨੂੰ ਬਖਸ਼ਣ ਦਾ ਬਚਨ ਹਾਰ ਸੱਚਾ ਪਾਰਸ਼ਾਹਾਂ ਦਾ ਪਾਰਸ਼ਾਹ ਪਾਰਸ਼ਾਹ ਦਾ ਪਾਰਸ਼ਾਹ ਬਣ ਜਾਵੇ ਉਹ ਜਦੋਂ ਸੱਚ ਦਾ ਹੁੰਦਾ ਦੀਦਾਰ ਸੱਚਾ ਸੱਚ ਸਾਰਿਆਂ ਜੀਵਾਂ ਦੇ ਵਿੱਚ ਵੱਸਦਾ ਸੱਚ ਸਾਰੇ ਜੀਵਾਂ ਦੇ ਵਿੱਚ ਵੱਸਦਾ ਇਹ ਨੂਰ ਸੱਚਾ ਅਨੰਕਾਰ ਦਾ ਹੈ ਜਦੋਂ ਸੱਚ ਤੇ ਝੂਠ ਦੀ ਪਰਖ ਹੁੰਦੀ ਫਿਰ ਸੱਚ ਹੀ ਝੂਠ ਨੂੰ ਮਾਰਦਾ ਹੈ ਫਿਰ ਸੱਚ ਹੀ ਝੂਠ ਨੂੰ ਮਾਰਦਾ ਹੈ ਅਰਜ਼ ਕੀਤਾ ਹੈ ਜੀ ਸੱਚੇ ਸੂਰਮੇ ਸੱਚ ਲਈ ਜੂਝਦੇ ਨੇ ਸੱਚੇ ਸੂਰਮੇ ਉਹ ਸੱਚ ਲਈ ਜੂਝਦੇ ਨੇ ਲੜਕੇ ਸੱਚ ਦਾ ਰਾਹ ਦਿਖਾ ਜਾਂਦੇ ਸ਼ਹੀਦ ਹੋਵੇ ਤਾਂ ਬਣੇ ਤਕਦੀਰ ਉਦੋਂ ਸ਼ਹੀਦ ਹੋਵੇ ਤਾਂ ਬਣੇ ਤਕਦੀਰ ਉਦੋਂ ਓਏ ਖੂਨ ਢੋਲ ਕੇ ਬੂਟਾ ਲਗਾ ਜਾਂਦੇ ਉਸ ਮਿੱਟੀ 'ਚੋਂ ਹੋਵੇ ਗੁਲਾਬ ਪੈਦਾ ਉਸ ਮਿੱਟੀ 'ਚੋਂ ਹੋਵੇ ਗੁਲਾਬ ਪੈਦਾ ਸੋਹਣੇ ਫੁੱਲਾਂ ਦੀ ਸ਼ਾਨ ਮਿਠਾ ਜਾਂਦੇ ਪਤੀ ਪਤੀ ਦੇ ਰੰਗਾਂ 'ਚੋਂ ਮਹਿਕ ਦੇ ਕੇ ਰੰਗ ਰੂਹਾਂ ਦੇ ਉੱਤੇ ਝੜਾ ਜਾਂਦੇ ਪਤੀ ਪਤੀ ਦੇ ਰੰਗਾਂ 'ਚੋਂ ਮਹਿਕ ਦੇ ਕੇ ਰੰਗ ਰੂਹਾਂ ਦੇ ਉੱਤੇ ਝੜਾ ਜਾਂਦੇ ਰੰਗ ਇਸ਼ਕ ਦਾ ਜੇਨਾਂ ਨੂੰ ਚੜ ਜਾਵੇ ਰੰਗ ਇਸ਼ਕ ਦਾ ਜੇ ਨਾ ਨੂੰ ਚੜ ਜਾਵੇ ਉਹ ਮੰਜ਼ਲ ਆਪਣੀ ਤੋਂ ਕਦੇ ਰੁਕਦੇ ਨਹੀਂ ਸੀਸ ਤਲੀ ਧਰ ਜਾਂਦੇ ਮੈਦਾਨ ਦੇ ਅੰਦਰ ਸ਼ਹੀਦ ਜ਼ੁਲਮ ਦੇ ਸਾਹਮਣੇ ਝੁਕਦੇ ਨਹੀਂ ਇਹ ਨਾਮ ਧਾਰੀਆਂ ਦੀ ਕੁਰਬਾਨੀ ਸੱਚ ਵਾਸਤੇ ਖੜਨਾ ਹੈ ਬੜਾ ਔਖਾ ਉਰ ਬਹੁਤ سارے ਬੰਦੇ ਤੌਰ ਵੀ ਗਏ ਸੀ ਸੱਚ ਵਾਸਤੇ ਓਏ ਖੜਨਾ ਹੈ ਬੜਾ ਔਖਾ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਸੱਚ ਵਾਸਤੇ ਖੜਨਾ ਹੈ ਬੜਾ ਔਖਾ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਸਿੱਧਕ ਬਾਸਤੇ ਜਿਨ੍ਹਾਂ ਨੇ ਬਚਨ ਕੀਤੇ ਸਿੱਧਕ ਬਾਸਤੇ ਜਿਨ੍ਹਾਂ ਨੇ ਬਚਨ ਕੀਤੇ ਲੱਖ ਲੱਖ ਮੁਸੀਬਤਾਂ ਚੱਲੀਆਂ ਨੇ ਓਏ ਖੂਨ ਡੋਲਿਆ ਸੱਚ ਤੇ ਧਰਮ ਦੇ ਲਈ ਖੂਨ ਡੋਲਿਆ ਸੱਚ ਤੇ ਧਰਮ ਦੇ ਲਈ ਤੇਗਾ ਰਣ ਵਿੱਚ ਉਹਨਾਂ ਨੇ ਠੱਲੀਆਂ ਨੇ ਪੁਰਦਾ ਪੁਰਦਾ ਹੋ ਗਿਆ ਮੈਦਾਨੇ ਅੰਦਰ ਤੋਂ ਪੰਜ ਇਹਨਾਂ ਦੇ ਧੜਾਂ ਦੇ ਚੱਲੀਆਂ ਨੇ ਤੋਂ ਪੰਜ ਇਹਨਾਂ ਦੇ ਧੜਾਂ ਦੇ ਚੱਲੀਆਂ ਨੇ ਸਾਰ ਸੱਚ ਦੀ ਸੂਰਮੇ ਜਾਣਦੇ ਨੇ ਸਰ ਸੱਚ ਦੀ ਸੂਰਮੇ ਜਾਣਦੇ ਨੇ ਵਿੱਚੋਂ ਹਮੇ ਦਬੈਤ ਨੂੰ ਮਾਰਦੇ ਨੇ ਉਹ ਦੁਖੀ ਦਰਦੀਆਂ ਦੇ ਦਰਦਬੰਦ ਬਣ ਕੇ ਤਨਮਨ ਤੇ ਤੁਹਾਨੂੰ ਵਾਰਦੇ ਨੇ ਜਦੋਂ ਜ਼ੁਲਮ ਤੇ ਜ਼ਬਰ ਦੀ ਹੱਦ ਹੋ ਜਾਏ ਜਦੋਂ ਜ਼ੁਲਮ ਤੇ ਜ਼ਬਰ ਦੀ ਹੱਦ ਹੋ ਜਾਏ ਉਦੋਂ ਸੂਰਮੇ ਜੰਗ ਵਿੱਚ ਬੜਕਦੇ ਨੇ ਜਦੋਂ ਜ਼ੁਲਮ ਤੇ ਜ਼ਬਰ ਦੀ ਹੱਦ ਹੋ ਜਾਏ ਉਦੋਂ ਸੂਰਮੇ ਜੰਗ ਵਿੱਚ ਬੜਕਦੇ ਨੇ ਦਇਆ ਧਰਮ ਸਿੱਧਕ ਅਣਖ ਦੇ ਲਈ ਡੋਲੇ ਜੋਸ਼ ਵਿੱਚ ਉਹਨਾਂ ਦੇ ਫਰਕਦੇ ਨੇ ਓਏ ਅਰਸ਼ ਫਰਸ਼ ਵੀ ਉਦੋਂ ਗੂੰਜ ਪੈਂਦੇ ਅਰਸ਼ ਫਰਸ਼ ਵੀ ਉਦੋਂ ਗੂੰਜ ਪੈਂਦੇ ਜਦੋਂ ਬੋਲ ਸੀਨੇ ਵਿੱਚ ਰੜਕਦੇ ਨੇ ਚਮਕੇ ਜ਼ਿੰਦਗੀ ਅਣਖ ਮੌਤ ਵਿੱਚੋਂ ਜਦੋਂ ਸੱਚ ਦੇ ਲਈ ਖੰਡੇ ਖੜਕਦੇ ਨੇ ਜਦੋਂ ਸੱਚ ਦੇ ਲਈ ਖੰਡੇ ਖੜਕਦੇ ਨੇ ਭਗਤੀ ਸ਼ਕਤੀ ਹ ਨੂੰ ਚੰਨ ਦਿੰਦੀ ਭਗਤੀ ਸ਼ਕਤੀ ਹ ਨੂੰ ਚੰਨ ਦਿੰਦੀ ਜਦੋਂ ਭੰਮੜ ਜ਼ੁਲਮ ਦੇ ਭੜਕਦੇ ਨੇ ਉਦੋਂ ਦੇਸ਼ ਦੀ ਕਿਸਮਤ ਜਾਗ ਪੈਂਦੀ ਫਿਰ ਫਤਿਹ ਦੇ ਬਦਲ ਨੇ ਅੱਜ ਹੈ ਕੋਈ ਸੂਰਮਾ ਸਿੱਧਕਵਾਲਾ ਅੱਜ ਹੈ ਕੋਈ ਸੂਰਮਾ ਸਿੱਧਕਵਾਲਾ ਜਿਹੜਾ ਪਿਆਰ ਦਾ ਮਾਰਗ ਦਿਖਾ ਦੇਵੇ ਅੱਜ ਹੈ ਕੋਈ ਸੂਰਮਾ ਸਿੱਧਕਵਾਲਾ ਉਹ ਜਿਹੜਾ ਪਿਆਰ ਦਾ ਮਾਰਗ ਦਿਖਾ ਦੇਵੇ ਸੰਤ ਸਪਾਈ ਹੋਵੇ ਚੜਦੀ ਕਲਾ ਸਾਂਝੀ ਬਾਲਤਾ ਦਾ ਮੇਲ ਕਰਾ ਦੇਵੇ ਕਿਹੜੀ ਕਰਨੀ ਤੇ ਰਹਿਣੀ ਸਹਣੀ ਹੋਵੇ ਰਾਜਨੀਤੀ ਦਾ ਸਬਕ ਪੜ੍ਹਾ ਦੇਵੇ ਵਿੱਚ ਦੁਨੀਆ ਦਾ ਸੂਰਜ ਦਾ ਨੂਰ ਬਣ ਕੇ ਵਿੱਚ ਦੁਨੀਆ ਦਾ ਸੂਰਜ ਦਾ ਨੂਰ ਬਣ ਕੇ ਮਸਬ ਧਰਮ ਦੀ ਜੋਰ ਜਗਾ ਦੇਵੇ ਜਾਤ ਪਾਤ ਦੇ ਬੰਦਰ ਨੂੰ ਤੋੜ ਦੇਵੇ ਜਾਤ ਪਾਤ ਦੇ ਬੰਦਰ ਨੂੰ ਤੋੜ ਦੇਵੇ ਉੱਚ ਨੀਚ ਦੀ ਪੰਗਤ ਲਗਾ ਦੇਵੇ ਕਰਮ ਕਾਂਡ ਭਰਮ ਭੰਡ ਧੋ ਕੇ ਸ਼ਬਦ ਗੁਰੂ ਦੇ ਨਾਲ ਮਿਲਾ ਦੇਵੇ ਦੁਨੀਆ ਜੰਮ ਦੀ ਹੈ ਹਰ ਪਾਸੇ ਦੁਨੀਆ ਜੰਮ ਦੀ ਹੈ ਹਰ ਪਾਸੇ ਜੰਮ ਬਿਰਲੇ ਹੀ ਪੂਰਨੇ ਪਾਉਣ ਵਾਲੇ ਦੁਨੀਆ ਜੰਮ ਦੀ ਹੈ ਹਰ ਪਾਸੇ ਜੰਮ ਬਿਰਲੇ ਹੀ ਪੂਰਨੇ ਪਾਉਣ ਵਾਲੇ ਕਈ ਜਾਨ ਦੀ ਬਾਜੀ ਹੈ ਲਾ ਜਾਂਦੇ ਕਈ ਜਾਨ ਦੀ ਬਾਜ਼ੀ ਹੈ ਲਾ ਜਾਂਦੇ ਕਈ ਹੁੰਦੇ ਨੇ ਮੌਕਾ ਟਰਕਾਉਣ ਵਾਲੇ ਕਈ ਜਾਨ ਦੀ ਬਾਜ਼ੀ ਹੈ ਲਾ ਜਾਂਦੇ ਕਈ ਹੁੰਦੇ ਨੇ ਮੌਕਾ ਟਰਕਾਉਣ ਵਾਲੇ ਓਏ ਉਹਨਾਂ ਜਨਤਾ ਦਾ ਕੀ ਸੁਧਾਰਨਾ ਹੈ ਉਹਨਾਂ ਜਨਤਾ ਦਾ ਕੀ ਸੁਧਾਰਨਾ ਹੈ ਜਿਹੜੇ ਹੁੰਦੇ ਗਦਾਰ ਫਸਾਉਣ ਵਾਲੇ ਧਰਮੀ ਦੇਖ ਗੁਲਾਮੀ ਨਹੀਂ ਸਹਿ ਸਕਦੇ ਅਮਰ ਹੁੰਦੇ ਨੇ ਕੋਮਾ ਜਗਾਉਣ ਵਾਲੇ ਅਮਰ ਹੁੰਦੇ ਨੇ ਕੋਮਾ ਜਗਾਉਣ ਵਾਲੇ ਓਏ ਗੀਤ ਗਾਉਂਦੇ ਨੇ ਸਦਾ ਕੁਰਬਾਨੀਆਂ ਦੇ ਗੀਤ ਗਾਉਂਦੇ ਨੇ ਸਦਾ ਕੁਰਬਾਨੀਆਂ ਦੇ ਲਖਦੇ ਕਭੀ ਜੋ ਕਵਤਾ ਸੁਣਾਉਣ ਵਾਲੇ ਦੇਸ਼ ਕੌਮ ਲਈ ਸਦਾ ਉਹ ਜੂਝਦੇ ਨੇ ਸ਼ਹੀਦ ਹੁੰਦੇ ਆਜ਼ਾਦੀ ਦਵਾਉਣ ਵਾਲੇ ਸ਼ਹੀਦ ਹੁੰਦੇ ਆਜ਼ਾਦੀ ਦਵਾਉਣ ਵਾਲੇ ਮਿੱਤਰ ਬਣ ਕੇ ਜੋ ਮਿੱਤਰ ਮਾਰ ਕਰਦੇ ਮਿੱਤਰ ਬਣ ਕੇ ਜੋ ਮਿੱਤਰ ਮਾਰ ਕਰਦੇ ਉਸ ਪਿੱਛੂ ਦਾ ਕਰੋ ਵਸਾ ਕੋਈ ਨਾ ਮਿੱਤਰ ਬਣ ਕੇ ਜੋ ਮਿੱਤਰ ਮਾਰ ਕਰਦੇ ਉਸ ਪਿੱਛੂ ਦਾ ਕਰੋ ਵਸਾ ਕੋਈ ਨਾ ਓਏ ਧਰਮਾਂ ਦੇ ਖੋਟਾ ਵਪਾਰ ਹੋਵੇ ਓਲੇ ਧਰਮਾਂ ਦਾ ਖੋਟਾ ਵਪਾਰ ਹੋਵੇ ਮਲੇ ਸ਼ਹਿਰ ਨੂੰ ਤਾਜੀ ਹਵਾ ਕੋਈ ਨਾ ਜਿਸ ਦੇਸ਼ ਦੀ ਮਿੱਟੀ ਪਲੀਤ ਹੋ ਜਾਏ ਜਿਸ ਦੇਸ਼ ਦੀ ਮਿੱਟੀ ਪਲੀਤ ਹੋ ਜਾਏ ਸਾਰੀ ਦੁਨੀਆ 'ਚ ਉਹ ਦੁਆ ਕੋਈ ਨਾ ਤੇ ਜਿਸ ਕੌਮ ਦੇ ਹੁੰਦੇ ਤੁਸ ਬਹੁਤੇ ਜਿਸ ਕੌਮ ਦੇ ਹੁੰਦੇ ਤੁਸ ਮਾਰ ਬਹੁਤੇ ਉਹਦੀ ਬੇੜੀ ਦਾ ਹੁੰਦਾ ਮੁਲਾਹ ਕੋਈ ਨਾ ਉਹਦੀ ਬੇੜੀ ਦਾ ਹੁੰਦਾ ਮੁਲਾਹ ਕੋਈ ਨਾ ਡੋਰੀ ਸੱਚ ਦੀ ਧਰਮੀ ਦੇ ਹੱਥ ਹੋਵੇ ਡੋਰੀ ਸੱਚ ਦੀ ਧਰਮੀ ਦੇ ਹੱਥ ਹੋਵੇ ਤੇਰਾ ਤੇਰਾ ਤੋਂ ਘਟ ਨਹੀਂ ਤੋਲ ਸਕਦਾ ਡੋਰੀ ਸੱਚ ਦੀ ਧਰਮੀ ਦੇ ਹੱਥ ਹੋਵੇ 13-13 ਤੋਂ ਘਟਨੀ ਤੋਲ ਸਕਦਾ ਆਪੂ ਜੜੇ ਦੇਸ਼ ਦੀ ਸੁੱਖ ਮੰਗੇ ਆਪੂ ਜੜੇ ਦੇਸ਼ ਦੀ ਸੁੱਖ ਸੁੱਖ ਮੰਗੇ ਸੁਣੀ ਚੜ ਕੇ ਵੀ ਧਰਮੀ ਨਹੀਂ ਡੋਲ ਸਕਦਾ ਉਹ ਸੁਣੀ ਚੜ ਕੇ ਵੀ ਧਰਮੀ ਨਹੀਂ ਡੋਲ ਸਕਦਾ ਪਿਆਰੀ ਸਾਧ ਸੰਗਤ ਜੀ ਇਹ ਹੈ ਨਾਮਧਾਰੀਆਂ ਦੀ ਕੁਰਬਾਨੀ ਕੋਈ ਖਲਾਜੀ ਦਾ ਬਾੜਾ ਨਹੀਂ ਜਦ ਮੈਂ ਅਕਾਲੀਆਂ ਦੇ ਵਿੱਚ ਬੋਲਦਾ ਹੁੰਦਾ ਸੀ ਉਹ ਕਹਿੰਦੇ ਸੀ ਮੇਰਾ ਦਿਮਾਗ ਖਰਾਬ ਹੋ ਗਿਆ ਫਿਰ ਬਾਹਰ ਜਿੱਲੇ ਸਵਾਲ ਜਵਾਬ ਕਰਨੇ ਮੈਂ ਕਹਣਾ ਭਈ ਬਾਬਾ ਰਾਮ ਸਿੰਘ ਦਾ ਤੁਸੀਂ ਇਤਿਹਾਸ ਪੜ ਕੇ ਦੇਖੋ ਉਹਦੀ ਕੋਈ ਰੀਸ ਕਰਕੇ ਦਿਖਾ ਲੈ ਮੈਨੂੰ ਕੋਈ ਵੀ ਅਕਾਲੀ ਫਿਰ ਮੈਂ ਜਾਣਾਂਗਾ ਕਿ ਅਕਾਲੀਆਂ ਦੇ ਵਿੱਚ ਦਮ ਹੈਗਾ ਆਪੋ ਆਪਣੀਆਂ ਚੌਧਰਾਂ ਨਾ ਕੁਰਸੀ ਦੀ ਖਾਤਰ ਅਕਾਲ ਤਖਤ ਸਾਹਿਬ ਜੀ ਨੇ ਨਾ ਹੀ ਬਦਨਾਮ ਕੀਤਾ ਕੋਈ ਭੁੱਲ ਚੁੱਕੋ ਭੁੱਲ ਚੁੱਕ ਹੋ ਗਈ ਹੋਵੇ ਤਾਂ ਪਿਆਰੀ ਸਤ ਸਿੰਘ ਜੀ ਮਾਫੀ ਦੇਣੀ ਸੱਚੀ ਗੱਲ ਕਹਿਣ ਤੋਂ ਮੈਂ ਕਦੀ ਵੀ ਨਹੀਂ ਚੇਚਕਾਂਗਾ ਕਿਉਂਕਿ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਦੇਸ਼ ਵਾਸਤੇ ਖੂਨ ਡੋਲਿਆ ਦੇਸ਼ ਨੂੰ ਆਜ਼ਾਦ ਕਰਾਇਆ। ਅਗਰ ਲੜਨਾ ਵੀ ਪੈ ਜਾਵੇ ਸੀਸਪੀ ਦੇਣਾ ਪੈ ਜਾਵੇ ਤਾਂ ਮੈਂ ਤੁਹਾਡੇ ਨਾਲ ਆ। ਮਾਰੇ ਕੱਲ ਕਦੀ ਵੀ ਨਾ ਬਰਦਾਸ਼ਤ ਕਰੋ ਕਿ ਸਤਕੁਰ ਰਾਮ ਸਿੰਘ ਨੇ ਕਰਵਾਨੀ ਨਹੀਂ ਕੀਤੀ। ਸੋ ਇਹਨੇ ਸ਼ਬਦ ਕਹਿੰਦਾ ਹੋਇਆ ਕੋਈ ਗਲਤੀ ਹੋ ਤਾਂ ਕੀ ਕਰਨੀ ਵਾਈ ਜੀ ਦਾ ਖਾਲਸਾ ਵਾਈ ਜੀ ਦੀ ਫਤਿਹ